ब्रह्मज्ञानी का एक के रंग ब्रह्मज्ञानी का बसे प्रभु संग ब्रह्मज्ञानी का एक रंग ब्रह्मज्ञानी को कोई रंग होता नहीं बहुत पैतराड ही बदलता है कि कोई अल्लाह साचे सजा का दर्द जुड़ता ਆਹ ਜਿਹੜਾ ਕੋਈ ਗਿਆਨੀ ਕਹੇ ਬਸੇ ਪ੍ਰਭ ਸੰਗ ਇਸ ਕਰਕੇ ਪ੍ਰਭ ਗਿਆਨੀ ਦੇ ਨਾਲ ਪ੍ਰਭ ਸੰਗ ਆਪੇ ਬਹੁਤ ਉੰਮੀ ਜਿਹੜਾ ਕੇ ਆ ਜਿਹੜਾ ਗਿਆਨ ਹੈ ਇਹ ਲੈ ਬ੍ਰਹਮਾ ਦੂਜਾ ਨਾਲ ਦਾ ਉਹ ਬੋਲਦਾ ਅੱਜ ਇਹ ਬਹੁਤ ਉੰਮੀ ਹੈ ਜਿਹੜਾ ਬਹੁਤ ਉੰਮੀ ਹੈ ਸਾਰੀ खोज ऐसे ना कीती है आज भी नहीं कीती है सारी खोज मैंने सिर्फ ब्रह्म ज्ञान ही आ रहा है लौजिक प्रभाव आ रहा है ब्रह्म ज्ञानी के बसे प्रभु संग ये ब्रह्म ज्ञानी संसारी है ना जे ना ब्रह्म ज्ञान जप लिया हम्म हम्म और ब्रह्म ज्ञान ਇਸ ਨਰੂਬੁਰ ਮਗਨ ਲੇ ਕੇ ਬਸਾਇਆ ਰਮ ਸੰਗ ਉਹਦੇ ਸੰਗ ਫਿਰ ਪ੍ਰੋਕਸਟ ਉਹਦੇ ਪਿੱਛੇ ਹੁਕਮ ਖੜਾ ਥਾ ਉਹਦਾ ਬ੍ਰਮਤਾ ਹੋਈ ਜਾਣਾ ਫਿਰ ਪ੍ਰਭ ਦੇ ਹੁਕਮ ਚਿਆ ਤਾ ਪੂਨ ਬਰੂਪ ਵੀ ਗਿਆ ਸਾਰੇ ਪ੍ਰਭ ਇਹ ਹੁਕਮ ਵੀ ਹਾਂ ਦਾ ਪ੍ਰਭ ਇਹ ਹੁਕਮ ਤੋਂ ਕੋਈ ਚੱਲਦਾ ਕਿ ਹਾਕਮ ਦੇ ਦਰਜਾ ਹੈ ਹੁਕਮ ਦੇ ਦਰਜਾ ਕੋਈ ਫਰਕ ਹੈ ਜਾਂ ਫਿਰ ਸਰਕਾਰ ਦੇ ਪਹਿਚਾਨ ਕਿਆ ਸਰਕਾਰ ਦੇ ਹੁਕਮ ਨੇ ਪਹਿਚਾਣ? ਕਰਤਾਇ ਕੋਈ ਅਗਰ। ਕਹਾਂ ਦੇ ਵਿੱਚ ਹੀ ਕਰਤਾਇ ਕੋਈ। ਹੁਕਮ ਕੜਾ ਸਰਕਾਰ ਤੋਂ ਕੋਈ ਵਖਰੀ ਗੱਲ ਹੈ। ਸਰਕਾਰ ਕੜਾ ਹੋਊ ਤਾਂ ਵਖਰੀ ਗੱਲ ਹੈ। ਦੁਆਨ ਵਖਰੇ ਬਰੇ ਜੀ ਕਰੇ ਨਹੀਂ ਸਕਦੇ। ਆ ਬੋਲਣ ਦੇ ਵਿੱਚ ਸਾਡੀ ਗੱਲ। ਬੋਲਣ ਦੇ ਵਿੱਚ ਆਏ ਸੀ ਦੋ ਕਹਨੇ ਪਰ ਹੈ ਇੱਕ। ਕੈਹ ਝੁਣ ਕੋ ਤੂੰ ਹਾਕਮ ਦਾ ਹੁਕਮ ਆਇਆ ਕੱਲਾ ਹੁਕਮ। ਕੋਈ ਗੱਲ ਨਾ ਬ੍ਰह्म ज्ञानी ਨਾਮ ਆਧਾਰ ਬ੍ਰह्म ज्ञानी ਕਾ ਨਾਮ ਪਰਵਾਰ ਪਰਮਯਾਤੀ ਦਾ ਆਧਾਰ ਕੀ ਹੈ ਨਾਮ ਹੈ ਅਗਿਆਨ ਆਧਾਰ ਆਯਾਦੀ ਹੈ ਨਾ ਉਹ ਹਾਂ ਇਹਦਾ ਆਧਾਰ ਮਾਇਆ ਨਹੀਂ ਹੈ ਮਾਇਆ ਇਹਦਾ ਆਧਾਰ ਹੈ ਇਹ ਸਾ ਲੈਂਦਾ ਹੈ ਤਮ ਉਹ ਚਲਦੀ ਹੈ ਠੀਕ ਹੈ ਇਹ ਚਲਾਉਂਦੀ ਸ਼ਕਤੀ ਨਾਲ ਦੁਤਾ ਸਰੀਰ ਆਲਤਾ ਫਿਰ ਇਹ ਹੈ ਫਿਰ ਮਾਟੀ ਦਾ ਪੁੱਤਰਾ ਕਿ ਐਸੇ ਚਲਦਾ ਹੈ ਮਾਟੀ ਦਾ ਪੁੱਤਰਾ ਆਧਾਰ ਕੀ ਹੈ ਦਾ ਜਲੰਦੀ की ਕੀ ਹੈ ਦੇ ਵਿੱਚ بس ਇੱਥੇ ਹੀ ਫਰਕ ਹੈ ਸਰੀਰ ਦਾ ਆਧਾਰ ਜੋਤ ਹੈ ਜਿਹੜੀ ਉਹਦੇ ਵਿੱਚ ਉਹ ਹੈ ਬਾਕੇ ਸਰੀਰ ਉਹ ਜੋਤ ਦਾ ਬਸ ਜੇ ਤੂੰ ਇਹ ਗੱਲ ਸਮਝ ਚਾ ਗਈ ਜੇ ਬਾਜ਼ੂ ਦੰਗਾ ਦੋ ਉਹੋ ਜਿਹੜੀ ਦੀ ਬੇਦੋੜੀ ਆਪਣੇ ਵੈਲਿਊ ਜ਼ਿਆਦਾ ਹੋ ਗਈ ਉਹਨ ਛੇੜੇ ਦੇ ਵੈਲਿਊ ਜ਼ਿਆਦਾ ਆਪਣੀ ਨਾ ਬਥਾਈ ਦੀ ਆਪ ਵੀ ਨਾ ਬਥਾਈ ਦੀ ਛੇੜ ਤਾਂ ਬੇਨਾਮ ਹੈ ਜ਼ੀਰੋ ਆ ਵੈਲਿਊ ਹੈ ਹਾਂ ਛੇੜ ਤਾਂ ਬੇਨਾਮ ਜ਼ੀਰੋ ਜਿਹੜਾ ਹੈ ਨਾ ਚੱਕਰ ਹੋਇਆ ਹੋਇਆ ਪੁੱਠਾ ਕਹਿੰਦਾ ਜਿੱਨਾ ਜਰ ਪੁੱਠਾ ਸੀ ਮਾਦੇ ਪੇੜ ਦੀ ਸਭ ਥੱਲੇ ਨੂੰ ਸੀ ਉਹਨਾਂ ਜੇ ਦੁਨੀਆ ਸਿੱਧੀ ਨਹੀਂ ਸੀ ਆਗੇ ਸਿਰ ਉੱਤਰੂਗਾ ਦੁਨੀਆ ਪੁੱਠੇ ਦੇ ਘਰ ਲੱਗੀ ਹੁਣ ਪੁੱਠੇ ਵੀ ਵੀ ਹੈ ਇਸ ਰੀਲਵਲਾ ਮੈਂ ਤਾਂ ਹੈ ਸਰੀਰ ਤੂੰ ਤੂੰ ਪਹਿਲਾਂ ਆਇਆ ਫਿਰ ਉਹ ਕਪੜਾ ਤਨ ਤੇ ਘੁਣਿਆ ਪਾਇਆ ਧਾਰਨ ਕੀਤਾ ਧਾਰਨ ਕੀਤਾ ਮਾਇਆ ਧਾਰੀ ਕੇ ਮੈਂ ਤਾਂ ਰੀਂਦ ਗਿਆ ਕਪੜਾ ਪੁੰਨ ਗਿਆ ਆਪੇ ਪਾ ਲਿਆ ਆ ਆ ਗਲ ਸੂਤ ਲੱਗੋ ਅਧਕਾਈ ਉਥੇ ਕੀ ਲੱਗਿਆ ਸੂਤ ਅਧਕਾਈ ਲੱਗਿਆ ਨਹੀਂ ਹੋਇਆ ਉਹ ਤਾਂ ਥੱਲੇ ਹੈ ਨਾ ਬਰੀਕੀ ਘੋੜਿਆਂ ਨੇ ਉਹ ਡਾਕਟਰ ਸਾਹਿਬ ਦੇਖਦੇ ਨੇ ਕਿੰਨੀਆਂ ਨਾੜੀਆਂ ਦੀ ਗਲਤੀਆਂ ਨਹੀਂ ਕਰ ਸਕਦੇ ਧਾਗਿਆਂ ਦੀ ਸੂਤਾਂ ਦੀ ਕਿ ਤੋਂ ਆਇਆ ਨਾ ਅਗਰ ਉਹ ਨਾ ਜਿਵੇਂ ਮੈਂ ਆਇਆ ਚਲੋ ਬਾਹਰ ਚਾਹੀਏ ਰੋ ਪਪਾ ਤਾਂ ਇਹ ਗੱਲ ਬਲਤੋ ਜਾਂਦੇ ਨਹੀਂ ਮੁੱਢੀ ਗੱਲ ਸਾਡੀ ਇਹ ਹੈ ਕਿ ਜੋਤ ਪਹਿਲਾ ਜਨਮ ਹਸਰੀ ਤੇ ਕਪੜਾ ਹਸਰੀ ਤੇ 84 ਦਾ ਫਿਜੂਮ ਲਈਆ ਤਰਾਤਾ ਦੇ ਲੈ ਰਿਹਾ ਸੀ ਤਾਂ ਜਦੋਂ ਇਹ ਗੱਲ ਸਾਡੇ ਦਿਮਾਗ 'ਚ ਘੜ ਕਰ ਗਈ ਕਿਸਨੀਆਂ ਜੋ ਜੋ ਦੋਦੀ ਫੇਰ ਗੱਲ ਖੁੱਲਣੀ ਸ਼ੁਰੂ ਹੋਣੀ ਸੁਣੀ ਹੋਈ ਆ ਘੜ ਕਰ ਗੱਲ ਸੁਣਨੀ ਹੋਰ ਗੱਲ ਆ ਗੱਲ ਘੜ ਘੜ ਕੇ ਦਿਮਾਗ 'ਚ ਉਹ ਫਿਰ ਵਿਚਾਰਦਾ ਫੇਰ ਗੱਲ ਫਿਰ ਬੋਲਦਾ ਹਾਂਜੀ ਪਰਮ ਗਿਆਨੀ ਨਾਮ ਪਰਿਵਾਰ ਹਾਂ ਨਾਮ ਅਗਰ ਉਹ ਹੀ ਪਰਿਵਾਰ ਹੈ ਉਹਦੇ ਵਿੱਚ ਅਨੇਕ ਇੱਕ ਦੇ ਵਿੱਚ ਹੀ ਨੇ ਹੁਕਮ ਆਇਆ ਨਾਮ ਨੇ ਮੰਮੇ ਨੂੰ ਓਖੜਾ ਉਹ ਨਾਮ ਆਇਆ ਉਹ ਹੀ ਪਰਵਾਹ ਆਦਾ ਨਾਮ ਵੀ ਸਾਰੇ ਹੀ ਨੇ ਉਹ ਉਹ ਸਾਰੇ ਹੀ ਨੇ ਜਿੱਥੇ ਜਿੱਥੇ ਜਿੱਥੇ ਹੁਕਮ ਆਇਆ ਸਾਰੇ ਹੁਕਮ ਆ ਉਦੋਂ ਉਦੋਂ ਦਾ ਪਰਵਾਹ ਆਦਾ ਜਿੱਥੇ ਘਰ ਦੇ ਵਿੱਚ ਹੁਕਮ ਹੈ ਉਹ ਤੇ ਉਹ ਹੈ ਜੋ ਜਿਹੜੇ ਗੁਰੂ ਤੋਂ ਵਾਦ ਜੈਸਤ ਕਰਦਾ ਦਾ ਕਾਇਤਾ ਨਾਮ ਪਰਵਾ ਨਾ ਰਹੋ ਨਾਮ ਪਰਵਾ ਲੱਭ ਲੋ ਮੁਰ ਵਾਇਗਰੂ ਪਰਵਾ ਰਹੇਗਾ ਪਰਵਾ ਤਾਂ ਉਹਦੇ ਗੁਣ ਹੀ ਹੁੰਦੇ ਨੇ ਸਾਰੇ ਸਦਾ ਉਹਨਾਂ ਨੇ ਭੈਣ ਭਾਈ ਹੁੰਦੇ ਨੇ ਇਹਨੂੰ ਇਹ ਗੱਲ ਜੇ ਵੇਰ ਵਾਲੇ ਪਰਿਵਾਰ ਕਿਵੇਂ ਸਾਬਤ ਕਰਨੇ ਆ ਉਹ ਤਾਂ ਇੱਕ ਹੈ ਪਰਵਾ ਤਾਂ ਤਾਂ ਬਹੁਤ ਵੱਡਾ ਹੁੰਦਾ ਹਾਂ ਜਦੋਂ ਉਹ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅੰ ਬੁੱਧੀ ਤਿਆਗਤ ਬ੍ਰਹਮ ਗਿਆਨੀ ਸਦਾ ਸਤ ਜਾਗਤ ਜੇ ਇਹ ਜਾਗਦਾ ਤਾਂ ਪਰਮੇਸ਼ਰ ਵੀ ਜਾਗਦਾ ਤਾਂ ਇੱਕੋ ਹੀ ਬਿਲਕੁਲ ਉਹ ਗੱਲ ਤਾਂ ਇਹ ਆਪਰ ਮੈਂ ਸਰਕਾਰ ਨੂੰ ਨਾ ਕਹਾਂਗਾ ਸਦਾ ਜੋ ਸਰ ਵੀ ਸਦਾ ਸਤ ਉਹਦੇ ਵੀ ਹੈਦੇ ਵੀ ਹੈ ਸਦਾ ਸ ਜਾਗਦੇ ਬ੍ਰਹਮ ਗਿਆਨੀ ਅਹੰਕੂਤੀ ਤਿਆਗਦੇ ਅਹੰਕੂਤੀ ਤਿਆਗਦੇ ਇਹ ਤਾਂ ਬਿਲਕੁਲ ਕਿਹਦੇ ਵਿਅਕਤੀਵਾਦੀ ਆ ਰਿਹਾ ਜਿਹੜਾ ਬਣਿਆ ਹਾਂ ਹਾਂ ਹੋਰ ਵੀ ਬਾਰੇ ਕੀ ਆਖੀਏ ਤਿਆਗਦੇ ਸਦਾ ਤਿਆਗਦਾ ਹੋ ਜਿਹੜੀ ਹਾਂ ਵਿਚਾਰਾ ਹੋ ਗੀ ਗਿਆ ਸੀ ਹਾਂ ਹੋਈ ਹੋਈ ਬਈ ਨਹੀਂ ਮੈਂ ਜਾਗਦਾ ਰਾਨਾ ਜੀ ਖੁਦਾ ਦੇ ਪੇਧਨਾ ਉਹ ਆਗਲਾ ਹੋ ਰਾਨਾ ਜੀ ਖੁਦਾ ਦੇ ਪੇਧਨਾ ਕਿਸੇ ਦੇ ਨੇ ਉਹ ਚਾਹਦੇ ਜਾਗਦਾ ਉਹ ਵੀ ਜਾਗਦੇ ਨੇ ਜਾਗਦੇ ਕੋਈ ਜਾਗਦਾ ਬੁਲਾ ਜਾਗਦਾ ਜਾਗਦੇ ਮਿਲਿਆ ਉਹਨੇ ਸੁਦਰਪਾਨ ਨੂੰ ਪਸਾਦੀ ਉਹ ਕਹਾਂਗਾ ਆਇਰੋ ਵੀ ਜਾਗਦਾ ਉਹ ਵੀ ਜਾਗਦੇ ਉਹ ਨਾਲ ਹੀ ਨੇ ਮਿਲਿਆ ਉਹ ਕੋਈ ਦੱਸਦਾ ਜੀ ਹੈਗਾ ਕਹਿੰਦਾ ਨੇ ਜੇਹਰਾਂ ਨੂੰ ਕਹੇ ਤਾਂ ਇਹਨਾਂ ਨੇ ਉਹਦੀ ਗੱਲ ਸਮਝੀ ਇਹ ਵਾਲੀ ਗੋਲੀ ਬੋਲ ਕੇ ਸਮਝਾਉਣਾ ਗੁਰੰਗਣੀ ਅਮਨਾਲੀ ਬੋਲਣੀ ਬੋਲਣੀ ਇਹਨਾਂ ਵਾਲੀ ਗੋਲੀ ਬੋਲਣੀ ਪੁਰਾਣੇ ਬੋਲੀ ਹੋਰ ਬੋਲਣੀ ਹੈ ਨਾ ਹੋਰ ਬੋਲਣੀ ਇਹ ਇਹਨਾਂ ਵਾਲੀ ਗੋਲੀ ਬੋਲਣੀ ਹੈ ਉਹਨਾ ਦੀ ਡਿਊਟੀ ਕੁਝ ਕਰ ਲਓ ਜੋ ਚਾਹੁੰਦੇ ਨਾ ਕਰ ਲਓ ਕੀ ਦੀ ਬਿਊਟੀ ਐ ਜੋ ਚਾਹੇ ਉਹ ਦੱਸਣ ਜੋ ਚਾਹੁੰਦੇ ਰੋ ਦੱਸਣ ਕਰਨਾ ਤੁਸੀਂ ਆਪ ਹੈ ਇਹ ਆਉਣਾ ਕਰਨਾ ਚੱਲ ਕਰਨਾ ਜਾਂ ਤਾਂ ਉਹ ਕਰਨਾ ਜੇ ਇੱਛਾ ਹੈ ਦੇਣਾ ਜੋ ਮਰਜ਼ੀ ਕਰ ਦੋ ਰਾਜਾ ਰਾਮ ਆਇਆ ਫੇਰੇ ਨਾ ਫੇਰੇ ਇਹਨੂੰ ਦੱਸਣ ਕਰਨਾ ਜੇ ਉਹਨਾਂ ਨੇ ਕਿਹਾ ਜੇ ਇਹ ਚਾਹ ਪੂਰੀ ਕਾਰਨਾ ਉਹਨਾਂ ਨੂੰ ਹਰਾਦੀ ਸਕਦਾ اچھا ਕੀ ਹੈ ਉਹਨਾਂ ਨੇ ਕਰਨਾ ਹੈ ਇਹ ਇਹਨਾਂ ਤੋਂ ਕਰਾਉਂਗਾ ਆਪ ਕਲਨਾ ਹੈ ਇਹਨਾਂ ਤੋਂ ਕਰਾਉਣਾ ਉਹ ਡਿਊਟੀ ਦਾ ਮਤਲਬ ਦੱਸਣਾ ਇਹ ਤੋਂ ਇਹਨਾਂ ਨੂੰ ਪਿੱਛੇ ਜੋ ਵੀ ਜੋ ਕੁਝ ਹੋ ਰਿਹਾ ਹੁਕਮ ਪੂਜਣਾ ਹੁਕਮ ਬਾਰੇ ਦੱਸਣਾ ਜਾਣਣਾ ਇਹ ਵੀ ਇਹਨਾਂ ਦੀ ਡਿਊਟੀ ਹੋਣੀ ਹੈ ਜਮਣਵਾਲਾ ਹੁਕਮ ਹੈ ਬਾਕੀ ਕਿਸੇ ਇਮਸਾਨ ਨਹੀਂ ਜੇ ਜਮਣਵਾਲਾ ਹੁਕਮ ਹੈ ਨੁਕਸਾਨ ਹੁਕਮ ਨਾਲੇ ਹੁੰਦਾ ਤੇ ਦੂਏ ਦਾ ਆਪਾਂ ਨੂੰ ਸੋਚਣ ਦੀ ਲੋੜ ਪਈ ਦੂਏ ਦਾ ਬੋਲ ਲੈਣ ਦਾ ਸੋਚਣ ਜਾਂਦਾ ਦੂਏ ਦਾ ਪਰ ਤਾਂ ਹੁਣੇ ਕੁਛ ਨਹੀਂ ਉਹਦੇ ਨਾਲ ਬਹੁਤ ਲੋਕਾਂ ਦਾ ਸਭਾ ਆ ਦੇ ਵਿੱਚ ਫਰੋਆ ਆ ਗਲਤ ਕੰਮ ਆਪੇ ਛੱਡ ਦਿੰਦੇ ਨੇ ਇਹਨਾਂ ਨੂੰ ਸਮਝ ਆ ਜਾਂਦੀ ਹੈ ਜੇ ਪ੍ਰਚਾਰੇ ਹੁੰਦਾ ਰਹੇ ਲਗਾਤਾਰ ਆਪੇ ਛੱਡ ਮੰਨੋ ਉਹ ਦੁਪਹੀ ਛੱਡ ਚੈਰਿੰਗ ਕਰਦੇ ਕਿਉਂਕਿ ਇਹਦੇ ਲੀਡਰ ਨੇ ਉਹਦਾ ਨੁਕਸਾਨ ਕਿ ਹੋਵੇਗਾ ਹਾਂ ਬ੍ਰਹਮ ਗਿਆਨੀ ਅਮੂਰਤੀ ਤਿਆਗਤ ਆਪਨੇ ਛੱਡਦਾ ਹਮ ਬ੍ਰਹਮ ਗਿਆਨੀ ਮਨ ਪਰਮਾਨੰਦ ਬ੍ਰਹਮ ਗਿਆਨੀ ਕਹੇ ਘਰ ਸਦਾ ਆਨੰਦਸ ਰੁਪ ਗਿਆਨੀ ਕੇ ਕਾਰ ਪਰਮ ਆਨੰਦ ਪਰਮ ਆਨੰਦ ਪਰਮ ਦੀ ਅਨਾਦਤੀਵ ਆਨੰਦ ਹੀ ਆਪਣੇ ਵਾਸਤੇ ਮੈਂ ਅੱਜੋ ਬਹੁਤ ਨਿਕਲ ਗਿਆ ਪਰਮ ਗਿਆਨੀ ਕੋ ਜਾਰੇ ਬਿਦਾਰ ਸਨ ਉਹਦੇ ਤਾ ਜੋ ਅਨੰਦ ਦਾ ਗਿਆਨ ਹੋਇਆ ਅਨੰਦ ਦਾ ਸਭ ਕੋ ਹੈ ਅਨੰਤ ਗੁਰੂ ਤੇ ਜਾਣੇ ਇਹ ਗੁਰੂ ਰੂਪ ਹੋ ਗਿਆ ਉਹ ਜਿਹਾ ਹੀ ਹੋ ਗਿਆ ਅਗਲੀ ਸਟੇਜ ਹੈ ਹੁਣ ਇਹ ਤਾ ਜੋ ਅਨੰਦ ਜਾਣਿਆ ਨਾ ਤੋਤਾ ਕੀ ਸਦਾ ਆਉਂਦੇ ਸਦਾ ਨੰਦ ਸਦਾ ਨੰਦੀ ਪਰਮਾਨੰਦ ਹੁੰਦਾ ਹੈ ਸਦਾ ਪਰਮਾਨੰਦ ਹੋ ਗਿਆ ਪਰਮਾਨੰਦ ਅਸਰ ਕਰਕੇ ਉਹ ਇਹ ਉਹ ਆਨੰਦ ਹੈ ਉਹ ਸੁਖ ਹੈ ਜਿਹਦੇ ਬਾਅਦ ਤੇ ਹੁਣ ਦੁੱਖਾ ਨਹੀਂ ਹੁਣ ਇਹ ਜਿਹੜਾ ਦਿਲ ਹੈ ਇਹ ਦੁਖਾਇਆ ਹੀ ਨਹੀਂ ਜਾ ਸਕਦਾ ਦੁੱਖਾ ਨਹੀਂ ਜਾਇਦਾ ਮਤਲਬ ਇਹ ਹੈ ਕਿ ਦੁੱਖਾਂ ਤੋਂ ਪੈਦਾ ਹੁੰਦਾ ਏ ਸਾਡੇ ਜਿਆਦੇ ਹੁਕਮ ਨੂੰ ਤੋਂ ਖਰੂਪ ਬੁੱਧਿਆ ਤਾਂ ਦੁੱਖ ਰੂਪ ਇਸ ਲੱਗਦਾ ਸਾਨੂੰ ਤੋੜ ਸਕੋ ਹੁਕਮ ਇਹ ਕਹਨਾ ਦੂਖ ਭੂਖ ਸਦਮਨ ਨਾ ਵੀ ਦਾਤਰੀ ਦਾ ਦਾਗ ਗਿਆਨੀ ਸੁੱਖ ਸਹਿਜ ਨਿਵਾਸ ਪ੍ਰਭਿਆਦੀ ਦਾ ਸੁੱਖ ਔਰ ਸਹਿਜ ਸੁੱਖ ਤੇ ਨਿਵਾਸ ਸੁੱਖ ਔਰ ਸਹਿਜ ਜਾਗਦੇ ਦਾ ਸੁੱਖ ਹੁੰਦਾ ਸਹਿਜ ਸੁੱਖ ਜਾਗਦੇ ਦਾ ਸੁਤੇ ਆ ਵੀ ਸੁੱਖ ਹੈ ਤੋ ਉਹ ਸੁੱਖ ਹੈ ਸੁੱਖ ਸਹਿਜ ਨਿਵਾਸ ਜਾਗਰਤ ਵਸਾਲਾ ਸੁੱਖ ਹੁੰਦਾ ਵਕਈ ਸੁੰਗੀ ਨੂੰ ਕਹਿਣਾ ਨਹੀਂ ਨਾਲ ਕੋ ਆਤਮਕ ਸੁਖ ਉਹਦੇ ਕੋਲ ਸਰੀਰਕ ਸੁਖ ਦੀ ਗੱਲ ਨਹੀਂ ਹੈ ਕੋ ਨਹੀਂ ਬਨਾਸ ਇਸ ਕਰਕੇ ਆ ਕਹਿੰਦਾ ਉਪਰ ਗਿਆਨੀ ਦਾ ਨਾਸ ਕੀ ਨਹੀਂ ਹੁੰਦਾ ਉਹਦੀ ਅਕਲ ਦਾ ਨਾਸ ਨਹੀਂ ਹੁੰਦਾ ਉਹਦੇ ਹੌਸਲੇ ਦਾ ਨਾਸ ਨਹੀਂ ਹੁੰਦਾ ਉਹਦੇ ਧੀਰੇ ਦਾ ਨਾਸ ਨਹੀਂ ਹੁੰਦਾ ਉਹਦੇ ਜਾਨ ਦਾ ਨਾਸ ਨਹੀਂ ਉਦੇ ਉਗਲਾਂ ਦਾ ਨਾਸ਼ ਗੁਣਾ ਦਾ ਨਾਸ਼ ਨਹੀਂ ਹੁੰਦਾ ਹਰ ਕਿਸਰ ਤੇਰੇ ਗੁਣ ਘਲੇ ਨਾ ਉਹਦਾ ਕੁਝ ਵੀ ਨਹੀਂ ਨਾਸ ਹੁੰਦਾ ਜੋ ਜਨ ਜਾਣ ਭਜਾ ਪਰ ਖੋਤਬ ਸਿੱਕ ਕਾ ਕਛੂ ਨਾ ਨਾਸਾ ਪ੍ਰਵਦਾ ਗਿਆਨ ਜੋ ਜਨ ਜਾਣ ਜਿਹੜੇ ਆਦਮੀ ਪਹਿਲਾਂ ਜਾਣ ਲੈਂਦੇ ਨੇ ਭਜਾ ਫਿਰ ਉਹਦੇ ਨਾਲ ਜੁੜਦੇ ਨੇ ਜੋ ਜਨ ਜਾਨ ਭਜਾ ਪੁਰਖोत्तम उत्तम ਨੂੰ ਜਿਹੜੇ ਜਾਣ ਕੇ ਸਮਝ ਕੇ ਉਹਦੇ ਨਾਲ ਜੁੜਦੇ ਨੇ ਜਿੰਨ ਕਾ ਕਛੂ ਨਾ ਨਾਸਾ ਆਈ ਹੈ ਉਹਨਾਂ ਦਾ ਕੁਝ ਵੀ ਨਾਸ ਨਹੀਂ ਹੁੰਦਾ ਵੀ ਉਹ ਗੱਲ ਕਹੀ ਰਵਿਦਾਸ ਨੇ ਗੱਲ ਕਹੀ ਆ ਉਹ ਗੱਲ ਇੱਥੇ ਵੀ ਕੀਤੀ ਰੋਗਿਆ ਨਹੀਂ ਤਾਂ ਨਹੀਂ ਨਾ ਇਹ ਸਰੀਰ ਦੀ ਗੱਲ ਨਹੀਂ ਹੈ ਇਹ ਰੋਗਿਆ ਦੀ ਸਰੀਰ ਹੈ ਜਿਹਦਾ ਮਾਲਾ ਜਿਹਦਾ ਕਪੜਾ ਪਾਇਆ 100 ਵਾਰ ਬਦਲਦਾ ਹੁੰਦਾ ਰਿਹਾ ਜੇ ਸਰਗੋ ਜੇ ਉਹ ਧੰਦੇ ਨੂੰ ਚਲੀ ਗਈ ਢਰਕ ਵਾਲ ਨੂੰ ਬਨਾਸ ਹੋ ਗਿਆ ਉੱਥੇ ਅਕਲ ਦਾ ਜਾਂਦੋ ਉਹ ਮਰਦਾ ਨਹੀਂ ਹੈ ਜੀ ਉਹ ਪਰ ਅਕਲ ਦਾ ਗ੍ਰਿਵਤ ਨਹੀਂ ਰਹਿੰਦੀ ਹੈ ਨਾ ਉਹ ਸੁਰਗ ਦੇ ਦਾ ਠਾਂ ਵਧਾ ਆਇਆ ਔਰ ਕੁਝ ਨਹੀਂ ਆਇਆ ਮਰ ਹੋ ਗਿਆ ਸੁਰਗ ਚਲਾ ਗਿਆ ਮਰ ਮਰਾ ਹੋ ਗਿਆ ਨਰਗਾ ਚਲਾ ਗਿਆ ਦੂਰ ਤੱਕ ਦੇਂਦਾ ਦੂਰ ਦ੍ਰਿਸ਼ਟੀ ਹੈ ਤਾਂ ਹੋਰ ਦੂਰ ਦ੍ਰਿਸ਼ੀ ਹੋਗੀ ਦ੍ਰਿਸ਼ੀ ਬਦਲੇ ਪੈਦਾ ਹੋਗੀ ਤਜਰਸੀ ਨਰੇਦੀ ਹੋਗੀ ਨਰੇਦੀ ਸੋਚ ਨਹੀਂ ਆਉਂਦੀ ਬਥੇ ਆਉਂਦੀ ਉਹ ਜੋ ਤਾਂ ਆਖ ਨਹੀਂ ਅਗਰ ਨਾ ਅਕਲ ਦਾ ਨਾ ਹੈ ਹਾਂ ਉਹ ਇਸ ਤਰ੍ਹਾਂ ਕਹਿੰਦੇ ਖਤਰਨਾਕ ਬੜੇ ਖਤਰਨਾਕ ਨੇ ਇਸ ਲਈ ਕੋ ਇੱਕਦਮ ਕਟਿਆ ਜਾਂਦਾ ਹੈ ਤੇ ਜੋ ਲੋਭ ਹੁੰਦਾ ਤਾ ਤਲਵਾਰ ਉਪਚਾਗੇ ਜਾਂ ਫਿਰਦਾ ਉਹ ਤਾਂ ਨਹੀਂ ਗੁੱਠਾ ਵੱਢ ਲਵੇ ਆਪਣਾ ਜੇ ਕਰਦਾ ਉੱਤੇ ਤੇ ਤਿੱਖੀ ਹੋਗੀ ਕਿ ਨਹੀਂ ਹੋਗੀ ਆਹੋ ਉਹ ਜਰਾ ਤਦਾਬ ਨਾਲ ਇਹ ਉੱਤੇ ਹੱਥ ਤਿੱਖੀ ਹੋਈ ਕਰਦਾ ਨਾ ਆਵੇ ਆ ਘੁੱਟ ਕੇ ਵੱਢੂ ਉਹਦਾ ਬੜਾ